ਅਥ श्री पास्क ਕੇ नाम दोहरा वीर गृहस्थि ग्रीवतार वरना युद्ध कायंत सकल नाम श्री पास्क के निक्षत चला अनंत ग्रीव गृहस्थन भवतारज जलधरज हथियार परो दुष्ट के कंठ में मोह कहो ले हो वार प्रथम नदन के नाम ले इस इस पद भाग शस्त्रचर सब पास्क के नाम जिन चित्रक गंगा इस बखान कह ई शस्त्र कहे अंत सकल नाम श्री पास्क के निक्षत ਜਟਤ ਜਾਨ ਵਿਕਰਤਹਾ ਗੰਗਾ ਈਸ਼ੁਖਾਨ ਆਜ ਧਿਆਨਤ ਬਖਾਨੀਐ ਨਾਮ ਪਾਸ ਕਹਿ ਜਾਨ ਸકલ ਅਗਨ ਕੇ ਨਾਮ ਲੈ ਹਾ ਆਯੁਧ ਸੋਭਖਾਨ ਸકલ ਨਾਮ ਸ੍ਰੀ ਪਾਸ ਕੇ ਚਤਰ ਚਿਤ ਮਹਿ ਜਾਨ ਖੇਲ ਵਿਗ ਪਾਪ ਬਖਾਨ ਕਹਿ ਰਿਪ ਪਦ ਸ਼ਾਸਤਰ ਬਖਾਨ ਸકલ ਨਾਮ ਸ੍ਰੀ ਪਾਸ ਕੇ ਲੀਧ ਚਤਰ ਪਛਾਨ ਆ ਬਖਾਨ ਕਹਿ ਨਾਸ ਨੀਏ ਸਤਰੁ ਨਾਮ ਸ੍ਰੀ ਪਾਸ ਕੇ ਚੀਂ ਸਕਲ ਜਟਨ ਕੋ ਨਾਮ ਲੈ ਜਾ ਪਤ ਅਸਤਰ ਬਖਾਨ ਅਮਿਤ ਨਾਮ ਸੀ ਪਾਸ ਕੇ ਚਤਰ ਚਿਤ ਮਹਜਾਨ ਤਉ ਸਤਰ ਬਖਾਨ ਕੈ ਭੀਤਿਕ ਗ੍ਰੰਥ ਬਖਾਨ ਸ਼ਸਤਰ ਸਬਦ ਪੁਰਪਾਖੀਐ ਨਾਮ ਪਾਸ ਪਹਿਚਾਨ ਗਿਰਪਦ ਪ੍ਰਿਥਮ ਬਖਾਨ ਕੈ ਨਾਸਨ ਰਾਤ ਸ਼ਸਤਰ ਸਬਦ ਪੁਰਪਾਖੀਐ ਨਾਮ ਪਾਸ ਪਹਿਚਾਨ ਫੋਕੀ ਨੋਕੀ ਪੱਖ ਕਰ ਪਤਰੀ ਪਰਿ ਬਖਾਨ ਪਛੀ ਪਾਛ ਕਹੋ ਸਕਲ ਪਾਸ ਕੇ ਨਾਮ ਕਸ਼ ਸ਼ਬਦ ਪ੍ਰਿਥਮ ਉਚਰੇ ਅਗਰ ਸ਼ਬਦ ਕਹਵੰਤ ਪਤਿਸ ਭਾਖਾ ਉਪਾਸ ਕੇ ਨਿਕਸੈ ਨਾਮ ਅਨੰਤ ਪੱਬਿਆ ਪ੍ਰਥਮ ਬਖਾਨ ਕੈ ਭਾਦਨ ਈਸ ਬਖਾਨ ਸ਼ਸਤਰ ਸ਼ਬਦ ਪੁਰੁ ਭਾਖੀਐ ਨਾਮ ਭਾਸ ਪਹਿਚਾਨ ਜਲ ਨਾਇਕ 바ਰ 70 ਸ਼ਸਤਰ ਸ਼ਬਦ ਪੁਰ ਦੇਹੋ ਸਕਲ ਨਾਮ ਫਰੀ ਭਾਖ ਕੇ ਚੀਨ ਚਤਰ ਚਿਤ ਲੇਹੋ ਸਭ ਗੰਗਾ ਕੇ ਨਾਮ ਲੈ ਪਤ ਕਹ ਸ਼ਸਤਰ ਬਖਾਨ ਸਵੈ ਨਾਮ ਫਰੀ ਕੇ ਲੀਜੋ ਚਤਰ ਪਛਾਨ ਜਮਨਾ ਪ੍ਰਥਮ ਬਖਾਨ ਕੈ ਏਸ ਅਸਤਰ ਕਹ ਅੰਤ ਸਕਲ ਨਾਮ ਸ੍ਰੀ ਪਾਸ ਕੇ ਨਿਕਸਤ ਚਲਤ ਕਾਲ ਇੰਦਰੀ ਪਦ ਪ੍ਰਥਮ ਪਨ ਇੰਦਰ ਸਬਦ ਕਹ ਅਸਤਰ ਬੌਰ ਕਉ ਕੇ ਨਿਕਸੈ ਨਾਮ ਅਨੰਤ ਕਾਲੁ ਜਾਪਦ ਪ੍ਰਥਮ ਕੈ ਇਸ ਰਾਸਤਰ ਪੁਨ ਭਾਖ ਸਕਲ ਨਾਮ ਸ੍ਰੀ ਪਾਸ ਕੇ ਚੀਨ ਚਤਰ ਚਿਤਰਾਖ ਕ੍ਰਿਸ਼ਨ ਬੰਨਵਾ ਪ੍ਰਥਮ ਕੈ ਇਸ ਰਾਸਤਰ ਕਹ ਅੰਤ ਸਕਲ ਨਾਮ ਸ੍ਰੀ ਪਾਸ ਕੇ ਨਿਕਸਤ ਸੂਰਜ ਪੁੱਤਰ ਕੋ ਪ੍ਰਥਮ ਕਹੈ ਆਪਾਤ ਕਹੈ ਸ਼ਾਸਤਰ ਬਖਾਨ ਸਗਲ ਨਾਮ ਫਰੀ ਪਾਤ ਕੇ ਲੀਜੀਓ ਚਤੁਰ ਪਛਾਨ ਭਾਰ ਆਤਮਜਾ ਆਦ ਕਹੈ ਅੰਤ ਆਇਦ ਪਤ ਦੇ ਹੋ ਸਗਲ ਨਾਮ ਇਹ ਪਾਤ ਕੇ ਤੀਨ ਚਤੁਰ ਚਿਤ ਲੇਹੋ ਸੂਰ ਆਤਮਜਾ ਆਦ ਕਹੈ ਅੰਤ ਸ਼ਾਸਤਰ ਪਦ ਸਗਲ ਨਾਮ ਫਰੀ ਕੇ ਤੀਨ ਚਿਤ ਪਰਵੀਨ ਕਾਲ ਪਿਤਾ ਪ੍ਰਥਮੈ ਉਚਰੇ ਅੰਤ ਤਨਜ ਪਦ ਦੇਹੋ ਪਾਤ ਕਹੈ ਅਸਤਰ ਬਖਾਨੀਐ ਨਾਮ ਪਾਸ ਲਖਲੇ ਹੋ देवकर तनुजा पृथुकाय पादकाय शास्त्र बखान सकल नाम श्री पांस के लीजो चक्र पहचान पांस गरीब हा कंठ रिप बरना युद्ध जेह नाम परो दुष्ट के कंठ में करो हमारे काम आज कंठ के नाम लए ग्राहक पद कहे अंत बरना युद्ध खे नाम सब निक्सल चलत बेअंत नार गृहिता बौर बखान सकल नाम पांस के निक्सल चलत अप्रमान जमुना प्रथम बखान कह एसरा युद्ध है बखान सकल नाम श्री भाग के चीनो छत्र सुजान का बरणादि बखान कह मंद वर्ण पद देहो होत है नाम क मंद कह चीन छत्र चित लेहो किसन आज पद उतर कह बल भात पद देहो पत असंत्रांत उचारिय ना पास लख लेहो वीर कृष्ट ने सब टहा काला ज जे नाम परो ਕਾਲ ਕਾਲ ਕਰਾਲਪਨ ਆਜ ਦੇ ਬੌਰ ਬਖਾਨ ਸਗਲ ਨਾਮ ਏ ਪਾਸ ਕੇ ਚਤਰ ਚਿਤ ਮਹ ਜਾਨ ਆਦ ਉਤਰੀਐ ਸੂਰਜ ਪਦ ਪੂਤ ਉਤਰੀਐ ਅੰਤ ਸਸਤਰ ਭਾਖੀਐ ਪਾਸ ਕੇ ਨਿਕਸਹਿ ਨਾਮ ਬੇਅੰਤ ਸਗਲ ਸੂਰਜ ਕੇ ਨਾਮ ਲੈ ਸੁੱਤ ਪਦ ਅਸਤਰ ਬਖਾਨ ਸਗਲ ਨਾਮ ਫਰੀ ਪਾਸ ਕੇ ਚਤਰ ਚਿਤ ਮਹ ਜਾਨ ਭਾਰ ਦਿਵਾ ਕਰ ਦਿਨਤ ਅਸਤਰ ਬਖਾਨ ਸਗਲ ਨਾਮ ਫਰੀ ਪਾਸ ਕੇ ਚਤਰ ਚਿਤ ਮਹ ਦੇਨ ਮਾਨਿ ਦੇਵਕਰ ਰਾਇਣ ਹਾ ਸੁਤ ਕਹਿ ਅਸਤਰ ਬਖਾਨ ਸਗਲ ਨਾਮ ਫਰੀ ਪਾਸ ਕੇ ਚਤਰ ਚਿਤ ਮੈਂ ਜਾਣ ਦਿਨ ਕੋ ਨਾਮ ਬਖਾਨ ਕਹਿ ਮਾਨਿ ਪਦ ਬਹੁਰ ਬਖਾਨ ਸੁਤ ਕਹਿ ਅਸਤਰ ਬਖਾਨੀਐ ਨਾਮ ਪਾਸ ਪਹਿਚਾਨ ਦੇਵਕਰ ਦਿਨ ਪਦ ਨਿਥਰ ਭਨ ਦਿਨ ਨਾਇਕ ਪੁਨ ਭਾਖ ਸੁਤ ਕਹਿ ਅਸਤਰ ਬਖਾਨੀਐ ਨਾਮ ਪਾਸ ਲਗਿ ਸਗਲ ਸੂਰਜ ਕੇ ਨਾਮ ਲੈ ਸੁਤ ਕਹਿ ਅਸਤਰ ਬਖਾਨ ਸਗਲ ਨਾਮ ਫਰੀ ਪਾਕੇ ਚਤਰ ਚਿਤ ਮੈਂ ਜਾਣ ਜਾਮਪਦ ਪ੍ਰਥਮ ਬਖਾਨ ਕੈ ਅਸਤਰ ਸ਼ਬਦ ਪੁੰਦੇ ਹੋ ਸਗਲ ਨਾਮ ਸ੍ਰੀ ਪਾਤਕੇ ਚੀਨ ਚਤੁਰਚਿਤ ਲੇ ਹੋ ਬਈ ਵਸਤ ਪਦ ਆਦ ਕੈ ਆਜ ਦੇ ਅੰਤ ਬਖਾਨ ਸਗਲ ਨਾਮ ਸ੍ਰੀ ਪਾਤਕੇ ਚਤੁਰਚਿਤ ਮਹਜਾਨ ਕਾਲ ਸ਼ਬਦ ਕੋ ਆਦ ਕੈ ਅਸਤਰ ਸ਼ਬਦ ਕੈ ਅੰਤ ਸਗਲ ਨਾਮ ਸ੍ਰੀ ਪਾਤਕੇ ਨਿਕਸਤ ਚਲੈ ਅਨੰਤ ਪਿਤ੍ਰ ਰਾਜ ਪਦ ਪ੍ਰਥਮ ਕੈ ਅਸਤਰ ਸ਼ਬਦ ਪੁੰਦੇ ਹੋ ਸਗਲ ਨਾਮ ਸ੍ਰੀ ਪਾਤਕੇ ਚੀਨ ਚਤੁਰਚਿਤ ਲੇ ਦੰਡੀ ਪ੍ਰਥਮ ਬਖਾਨ ਕੈ ਅਸਤ ਸਬਦ ਕੈ ਅੰਤ ਸਗਲ ਨਾਮ ਸ੍ਰੀ ਪਾਥ ਕੇ ਚੀਨੋ ਚਤਰ ਬਿਅੰਤ ਜਮਨਾ ਬਖਾਨ ਕੈ ਆਇਦ ਬੌਰ ਬਖਾਨ ਸਗਲ ਨਾਮ ਸ੍ਰੀ ਪਾਥ ਕੇ ਚਤੁਰ ਚਿਤ ਸਭ ਜਮਨਾ ਕੇ ਨਾਮ ਨੈ ਪ੍ਰਾਤ ਅਸਤਰ ਪੰਦੇਵ ਸਗਲ ਨਾਮ ਸ੍ਰੀ ਪਾਥ ਕੇ ਚਤਰ ਚਿਤ ਲਖਲੇ ਹੋ ਸਬਦ ਪ੍ਰਿਥਵੀ ਉਚਰੇ ਈਸਰ ਬੌਰ ਬਖਾਨ ਸਗਲ ਨਾਮ ਸ੍ਰੀ ਪਾਥ ਕੇ ਚਤਰ ਚਿਤ ਸਭ ਪਿੱਤਰਨ ਕੋ ਨਾਮ ਲੈ ਨਾਇਕ ਬਹੁਰ ਬਖਾਨ ਸਗਲ ਨਾਮ ਸ੍ਰੀ ਪਾਸ ਕੇ ਚਤਰ ਚਿਤ ਮਹਿ ਜਾਨ ਸਗਲ ਜਗਤ ਕੇ ਨਾਮ ਲੈ ਘਾਇਕ ਅਸਰ ਬਖਾਨ ਸਗਲ ਨਾਮ ਸ੍ਰੀ ਪਾਸ ਕੇ ਚਤਰ ਚਿਤ ਮਹਿ ਜਾਨ ਰਿਪ ਖੰਡਨ ਦਲ ਦਾ ਨੀ ਤਾਪਨੀ ਸੋਏ ਸਗਲ ਪਾਸ ਕੇ ਨਾਮ ਸਭ ਜਾਤਿ ਬਚਿਓ ਨਾ ਕੋਏ ਰਿਪ ਪਦ ਪ੍ਰਥਮ ਬਖਾਨ ਕੈ ਗ੍ਰਿਸਤਨੀ ਬਹੁਰ ਬਖਾਨ ਸਗਲ ਨਾਮ ਜਮ ਪਾਸ ਕੇ ਚਤਰ ਚਿਤ ਖਾਲ ਪਦ ਆਦ ਵਿਚਾਰ ਕਹ ਖੰਡਣ ਅੰਤਮ ਖਾਨ ਸਗਲ ਨਾਮ ਜਮ ਪਾਸ ਕੇ ਚੀਨੋ ਚਤੁਰ ਸੁਜਾਨ ਦਲ ਦਾਹਣ ਰਿ ਪ੍ਰਗ੍ਰਸਤ ਨਹੀਂ ਸਤਰ ਤਾਪ ਨਹੀਂ ਕਾਲ ਪਾਸ ਕੇ ਨਾਮ ਸਭ ਜਾਤੇ ਰਹਿਤ ਨਾ ਕੋਏ ਜਾ ਪਦ ਪ੍ਰਥਮ ਵਿਚਾਰ ਕਹ ਮੀ ਪਦ ਅੰਤਮ ਖਾਨ ਜਾਮੀ ਪਦੇ ਹੋ ਤੈ ਨਾ ਪਾਸ ਕੇ ਜਾਨੁ ਜਿਸਾ ਬਾਰ ਨਹੀਂ ਪ੍ਰਥਮ ਕਹ ਏਹ ਸ਼ਾਸਤਰ ਕਹ ਅੰਤ ਸਗਲ ਨਾਮ ਵੀ ਪਾਸ ਕੇ ਨਿਕ ਚਲਤ ਬੇਅੰਤ ਪਛਮਿਆ ਆਦ ਬਖਾਨ ਕਹਿ ਇਹ ਸਿਰ ਪਉਣ ਪਦ ਦੇ ਹੋ ਆਦ ਬੌਰ ਬਖਾਨ ਇਹ ਨਾਮ ਪਾਸ ਲਖ ਲੇ ਹੋ ਪ੍ਰਿਥਮ ਠੱਗਨ ਕੇ ਨਾਮ ਨਾਏ ਆਦ ਬੌਰ ਬਖਾਨ ਸકલ ਨਾਮੇ ਪਾਸ ਕੇ ਚਤਰ ਚਿਤ ਪਹਿਚਾਨ ਬਾਟ ਆਗ ਪਦ ਉਚਰ ਕੇ ਹਾ ਪਦ ਅਸਤ ਬਖਾਨ ਨਾ ਪਾਸ ਕੇ ਹੋਤ ਹੈ ਚਤਰ ਦੀਦੀ ਔ ਜਾਣ ਮਗ ਪਦ ਆਦ ਬਖਾਨ ਕਹਿ ਛਿਤ ਪਤ ਬੰਤ ਬਖਾਨ ਨਾ ਪਾਸ ਕੇ ਹੋਤ ਹੈ ਲੀਜੋ ਚਤਰ ਪਛਾਨ ਮਾਰਗ ਆਦ ਬਖਾਨ ਖਾਨ ਮਾਰ ਬਖਾਨਾ ਹੋ ਜੰਤ ਨਾ ਪਾਸ ਕੇ ਹੋਤ ਹੈ ਨਿਕਸ ਚਲੈ ਬੇਅੰਤ ਪੰਥ ਆਦ ਪਦ ਉਚਰ ਕਹਿ ਕਰਖਣਪੁਰ ਪਦ ਦੇਹੋ ਆਜਿ ਦਿ ਬੌਰ ਨਾ ਪਾਸ ਲਖ ਲੇਹੋ ਬਾਟ ਆਦ ਪਦ ਉਚਰ ਹਾ ਅਸਤਰਾੰਤ ਬਖਾਨ ਨਾ ਕੇ ਹੋਤ ਹੈ ਚੀਨੋ ਗੁਨ ਨਿਧਾਨ ਰਾਹ ਆਦ ਪਦ ਉਤਰੀਐ ਰੇਪ ਕਹਿ ਅਸਰ ਬਖਾਨ ਨਾ ਪਾਸ ਕੇ ਹੋਤ ਹੈ ਚਤੁਰਲੀ ਹੋ ਜਾਨ ਪ੍ਰਥਮੈ ਧਨ ਸਬਦੋ ਉਚਰੇ ਹਰਤਾ ਆਜੁ ਚੀਨ ਨਾ ਪਾਸ ਕੇ ਹੋਤੈ ਚਤੁਰਲੀ ਦਿਉ ਚੀਨ ਮਾਲਿਆ ਸਬਦੋ ਉਚਰ ਕੈ ਕਾਲ ਜਾਲ ਕਹੇ ਅੰਤ ਸਗਲ ਨਾਮੇ ਪਾਸ ਕੇ ਚੀਨੋ ਪ੍ਰਗਿਆਵੰਤ ਮਾਇਆ ਹਰਿ ਅਉਚਾਰ ਕੈ ਆਜੁ ਬੌਰ ਬਖਾਨ ਸਗਲ ਨਾਮੇ ਪਾਸ ਕੇ ਚਤਰ ਚੇਤ ਮਹਿ ਜਾਨ ਮਗਹਾ ਪਥਾ ਪਹਿੜਹਾ ਧਨ ਹ ਦ੍ਰਿਭ ਹ ਸੋਏ ਜਾ ਕੇ ਡਰਤੇ ਸੋ ਸੁਨੋ ਪਤਕ ਨਾ ਉਭਰਿਓ ਕੋਏ विखिया आरब बुखार कह आशिद अंतोचार ਨਾਮ पास के होत है लीजो चतुर सुधार भिक्षु विदाद उचार कह ताइक अस्त्र बुखार ना पास के होत है चतुर लीजी हो जान चंद्र भगा के नाम लए पात कह अस्त्र बुखार ना पास के होत है चीनो प्रज्ञावान ਸਤ ਸਭ ਦਾਤ ਬਖਾਨ ਕਹ ਏ ਸ਼ਾਸਤਰ ਕਹ ਅੰਤ ਨਾ ਸਕਲੇ ਪਾਸ ਕੇ ਚੀਨ ਲਹੋ ਬੁੱਧ ਅੰਤ